ਲੋਕੋ ਵਿਚਾਰਾ ਕਰੇ ਜਿੰਦਾਸ ਫਰਦੂਸ ਤਸੂਬ ਬਾਂਝਦਾ ਆਦਮੀ ਕਹਿਣ ਦਾ ਆਦਮੀ ਹੈ ਸਾਰੇ ਆਦਮੀ ਦੇ ਵਾਂਸਾ ਬੋਲ ਕੇ ਕਿ ਆ ਜ਼ਬਾਹ ਕੇ ਬਹਿ ਜਾਂ ਲੋ ਸਜੇ ਕਰਤੂਤ ਬਸੂੜੇ ਕੇ ਬਾਂਝਦਾ ਲੈ ਕਾਬੂ ਤਸੂਬ ਲੈ ਤਰੇ ਹਮ ਗਾਲਿਆ ਪਟੇ ਧਾਲੇ ਤੇ ਹਲੇ ਸੋ ਗਿਆ ਮਰਨਾ ਪੀਣਾ ਰਹਿਣਨ ਸੌਣਾ ਕਿਸਰ ਗਿਆ ਹੈ ਮਰਨਾ ਫਰੋੜੀ ਗੱਲ ਉਹਦੇ ਨੂੰ ਮਰਨਾ ਦਸਰੇ ਹੋਇਆ ਇਹ ਵੀ ਬੋਲੂ ਬੋਲ ਰਿਹਾ ਹੈ ਕਿ ਤੂੰ ਉਸ ਪਜ਼ੂਕ ਕਿ ਤੂੰ ਪਜ਼ੂਰ ਆਦਮੀਂ ਕਹਤਾ ਹੈ ਸਿੱਖ ਕਹਾਣੇ ਦਾ ਅਗਲੀ ਗੱਲ ਹੈ ਸਿੱਖ ਤਾਂ ਪਹਿਲਾਂ ਬਹੁਤ ਸੇ ਵੱਡੂ ਤਾਂ ਸਿੱਖ ਵੱਡੂ ਪਹਿਲਾਂ ਆਦਮੀ ਤਾਂ ਆਦਮੀ ਸੋਣ ਵਾਲਾ ਬੜੇ ਸਮਝੇ ਵਾਲਾ ਬੜੇ ਜੇ ਸਮਝਾਈ ਦੀ ਫੇ ਬਸੂ ਗਿਆ ਆਹ ਬਜਾ ਹਰ ਤੋਂ ਬੁੱਝਾ ਧੋਰਾ ਧੋਰਾ ਧੋਲ ਹੋ ਰਿਹਾ ਧੋਰਾ ਰਿhta ਹੈ ਹਾਏ ਉਹ ਹੀ ਪਾਸਾ ਉਹ ਜੱਗਹਿਂ ਵਾਲਾ ਸੀ ਲੋਰ ਗੱਡਾ ਪਾਸਾ ਗੱਡਾ ਬੋਲ ਲੋ ਲੋਰ ਲੱਭੀ ਸੋ ਲੱਤਿਕਾ ਪਾਸਾ ਪੁਲਿਸ ਨੂੰ ਦੋਹਰਾ ਨਾ ਹਸਾ ਵਰਨਾਈ ਦੋਹਰਾ ਦਾ ਲੋਰੀ ਲੋਰੀ ਮੋੜ ਦੀ ਆਇਆ ਹੋਇਆ ਦੇ ਆ ਬੜੀਆ ਉਹ ਜੂੜ ਉਹ ਗਵਾਰ ਰੋਟ ਟਵੰਦਾ ਟੋਟਵੰਦਾ ਇਹ ਤਾਂ ਬੱਚਾ ਜੀ ਬਾਹਰ ਹਾਂਜੀ ਕਿ ਤੂ ਵੀ ਕੋ ਜੋ ਕੁ ਮਨਸ ਜਾਸ ਲੋਕ ਪਚਾਰਾ ਕਰੇ ਦਿਨ ਬਸ ਲੋਕ ਵਿਚਾਰਾ ਤਨ੍ਹਾਤ ਕਰਦਾ ਸਵੇਰੇ ਹੁੰਦਾ ਉਹ ਵੀ ਜਾਂਦਾ ਇਨਾਮ ਵੀ ਦਗਾ ਮਾੜੀ ਵੀ ਬਣਦਾ ਨੇ ਵੀ ਕਰਦਾ ਲੋਕ ਦਿਖਾਉਂਦਾ ਰਹਦਾ ਲੋਕਾਂ ਨੂੰ ਕੱਪਰੇ ਨੂੰ ਬਦਲਾਇਆ ਇੰਤਾਰੇ ਹਾਂ ਦਾ ਲੋਕਾਂ ਨੂੰ ਅਸੇ ਤਰ੍ਹਾਂ ਕਿਉਂ ਬਿਚਾਰਿਆ ਰਿਹਾ ਤੁਸੀਂ ਲੋਕਾਂ ਦਾ ਸਾਹ ਵੀ ਦਾ ਸਾਹੇ ਵਾਸਤੇ ਇਹ ਲੋਕ ਕਿਹੜਾ ਰਹਿਤਾਂ ਲੋਕ ਕਿਹੜਾ ਰਹਿਤਾਂ ਚਾਰੇ ਤੋਂ ਉੱਤਰੀ ਲੋਕ ਵਿਚਾਰਿਆ ਹਮਦਰਦ ਕੋ ਲੋਕ ਵਿਚਾਰਿਆ ਕੋ ਬਾਹਰ ਨਿਕਲਦੇ ਸਾਕੀ ਸਭ ਲੋਕ ਵਿਚਾਰਦੇ ਲੋਕ ਵਿਚਾਰਾ ਕਰਦੇ ਨੇ ਲੋਕ ਵਿਚਾਰਾ ਕਰਦਾ ਉਸ ਵੇਲੇ ਜੋ ਕਰਦੇ ਸੀ ਉਹ ਦੀ ਕਰਦਾ ਅੱਜ ਆਲੇ ਹੋਰ ਅੱਜ ਆਲੇ ਨੂੰ ਕਹਾਂਗੇ ਉਹਨਾਂ ਨੇ ਉਹ ਸੀ ਉਹਨਾਂ ਦੇ ਜਬ ਕੇ ਆਏ ਸੀ ਉਹਨਾਂ ਦੇ ਬਗਵਾ ਤੋਂ ਇੱਕ ਆਪਕਾ ਦੇ ਸੀ ਅੱਜ ਕੋ ਚੁਰ ਗੱਲ ਤੇ ਹਾਂਜੀ ਬਾਹਰ पे ਇੱਕ ਅੰਤਰਮਲ ਮਾਇਆ ਸਭ ਸੁਨੇਹੇ ਕੁਛ ਕਰੇ ਚੁਕਾਇਆ ਬਾਹਰ ਤੇ ਇਹ ਬਾਹਰ ਤੇ ਇਹ ਤਾਂ ਰੰਗ ਬਣਾ ਹੈ ਅੰਦਰ ਮਾਇਦੀ ਮਾਰ ਹੋ ਗਈ ਬਾਹਰ ਦੀ ਮੱਖੋਂ ਗਈ ਬਾਹਰ ਤੇ ਅੰਦਰ ਮਲਮ ਆਇਆ ਆਇਆ ਜਿਹੜੀ ਇਹ ਉਹਦੀ ਇੱਛਾ ਤਾਂ ਹੋ ਗਈ ਹੈ ਬੰਤਾ ਫੇਰ ਮੇਰੇ ਦਾ ਮੜਿਆ ਇਹ ਖੁੱਖ ਮੰਦ ਦੇ ਵਿੱਚ ਤਾਂ ਹੈ ਉਹ ਹੀ ਆਇਆ ਬਾਹਰ ਤੇ ਅੰਦਰ ਮਲ ਕੰਮੇ ਕੰਮ ਹੋ ਗੋਦਾਰੇ ਦੇ ਵੀ ਜਿਹੜੇ ਰਹਿਣ ਵਾਲੇ ਨੇ ਉਹਨਾਂ ਦਾ ਫਸਾ ਉਹ ਤਨਖਾਹ ਵੀ ਘੱਟ ਕਰਦੇ। ਮਾਇਆ ਤੇ ਘੱਟ ਕਰਦੇ। ਜਦੋਂ ਆਹ ਤੋਂ ਪੰਚੀ ਸਦੋਂ ਗੋਦਾਰੇ ਭੜੂ ਨਹੀਂ ਹੁੰਦੀ ਹੋ ਉਹ ਉਪਦੇ ਇਹ ਧਰਮ ਨੂੰ ਘਮੀ ਪ੍ਰਚਾਰ ਕਰ ਜਿਹਨਾਂ ਦੇ ਅੰਦਰ ਇਹ ਬੋਲਵਾ। ਉਹ ਤਾਂ ਲੋਕ ਕਿਆ ਰਾਇ ਕਰ। ਉਹ ਲੋਕ ਵਿਚਾਰਾ ਹੁੰਦਾ। ਤਾਂ ਹੀ ਵਾਸਾ ਬੰਨਣਾ ਲੋ। ਆਹ ਉਹ ਤਰ੍ਹਾਂ ਪਿੱਛੇ ਵੀ ਜਿਹੜਾ ਪਾਠ ਕਰ ਉਹਦੇ ਪਿੱਛੇ ਸਾਨੂੰ ਇਹਨਾਂ ਰੋਟੀ ਰੋਟੀ ਆ ਰਹੀ ਆ ਜੀ ਨਾ ਉਹਨਾਂ ਤੇ ਆਪਣੇ ਤੇ ਅਸਲ ਤਰਫ ਦਾ ਕੋਈ ਤੋਂ ਦੂਏ ਦਾ ਪਰ ਨਹੀਂ ਜੀ ਦੂਏ ਦੀ ਸਮਝ ਤਾਂ ਕਾਹੀ ਨਾ ਹੋਊਗਾ ਦੂਏ ਨੂੰ ਸਮਝ ਦੱਸ ਤੇ ਕੋਈ ਪਤਾ ਹੋ ਕਿ ਦਸ ਦੇ ਪਹਿਲਾਂ ਹੀ ਉਹ ਜੀ ਸ਼ਾਂਤੀ ਹੋਣਾ ਦਾ। ਸੋਰੀ। ਬਾਹਰ ਤੇ ਇੱਕ ਅੰਤਰਮਲ ਆਇਆ ਸਭ ਚ ਨਹੀਂ ਕੁਸ਼ ਕਰੇ ਸਾਰੇ। ਅੱਜ ਫੌਮਦਾ ਜੇ ਲੋਕਾਂ ਦਾ ਗੱਲ ਸੁਣਾ ਦੂੰ। ਲੋਕਾਂ ਨੂੰ ਪਤਾ ਹੀ ਗਿਆ ਸਾਰੇ ਨੂੰ ਦਾ। ਲੋਕਾਂ ਨੂੰ ਬੜਾ ਪਤਾ ਦੀ। ਪਤਾ ਹੀ ਹੈ। ਜਿਹੜਾ ਕੋਈ ਆਦਮੀ ਪਤਾ ਹੀ ਹੈ ਸਭ। ਜੇ ਕੁਝ ਨਹੀਂ ਬੋਲਦਾ ਨਹੀਂ ਕਹਿੰਦਾ। ਉਹ ਰੱਬ ਲੂ, ਉਹ ਰੱਬ ਨੂੰ। ਦਾ ਨੰਨ ਲਰਦਾ ਨਹੀਂ ਲੋਕਾਂ ਨੂੰ ਪਤਾ ਛਪ ਚੁੱਕੇ ਹੀ ਕਾਚ ਕਰੇ ਚੁਪਾਇਆ ਜੇ ਕੋਈ ਛਪਾਉਣਾ ਚਾਹੁੰਦਾ ਵੀ ਉਹ ਵੇਰੋ ਮੇਰਾ ਜਾਨ ਲੋਕਾਂ ਨੂੰ ਪਤਾ ਵੀ ਕੋਪਲੇ ਤੇ ਛਪਦਾ ਜਾਂਦਾ ਨਹੀਂ ਪਾਬਲ ਦੇ ਨਾਲ ਜਾਣਦੀ ਆ ਸਭ ਪਤਾ ਹੀ ਆ ਉਹ ਹੀ ਆ ਕਿ ਖਾਪੀ ਜਦੋਂ ਬਿਲਿੰਗ ਦਾ ਇਸੇ ਖਬਰ ਤੋਂ ਵੀ ਦੀ ਹੈ ਲੋਕਾਂ ਨੂੰ ਮੇਰਾ ਪਤਾ ਹੀ ਹੈ ਮੈਂ ਬਿਲਿੰਗ ਦੀ ਲਾਈ ਗਈ ਉਹ ਗੱਲ ਆ ਛਪ ਚੁੱਕੇ ਹੀ ਕਾਚ ਕਰੇ ਚੁਪਾਇਆ ਬਾਹਰ ਗਿਆਨ ਧਿਆਨ ਇਸਾਨ ਅੰਤਰ ਵਿਆਪੇ ਲੋਭ ਸੁਆਨ ਇਹ ਪੜਦਰੋਂ ਕਹੀ ਹੈ ਗੱਲ ਸੁਆਨ ਆਇਆ ਨਾ ਲੋਭ ਸੁਆਨ ਸਾਨੂੰ ਦਾ ਕੋ ਸਾਦਾਰ ਫਰਨਾ ਜੋ ਕੀ ਸੁਆਨ ਦੀ ਇਤਸਾ ਜੋ ਕੀ ਬਾਹਰ ਬਚਾ ਉਹ ਕਰ ਲਈ ਜਾਂ ਚੋਕੀ ਨਹੀਂ ਲੱਗੂ ਹੁੰਦੀ ਇਹਦੇ ਅਜੋਕੀ ਇਹ ਤਾਂ ਪਤਾ ਲੱਗ ਜਾਂਦਾ ਕਿ ਤੌਂ ਕਦੋਂ ਗੱਲ ਕਹੀ ਸ਼ੁਰੂ ਹੋਈ ਉਹਨਾਂ ਨੇ ਜਿਹੜੀ ਨੂੰ ਕਹੀ ਯਾਰ ਉਹ ਇਕਲੂ ਦੇ ਜਾਣਾ ਤੁਹਾਨੂੰ ਕਹਿੰਦੇ ਉਹਨਾਂ ਨੇ ਕਿਸ ਗੋਹ ਕਰਦੀ ਬੱਜੀ ਉਹ ਅੰਤਰਮਲ ਮਾਇਆ ਉਹ ਜੋਗੀ ਦਾ ਤੁਕਦੀ ਉਹ ਨਹੀਂ ਕਹਿੰਦੀ ਉਹ ਤੋ ਆਹ ਤੇ ਆ ਆ ਅਨਾਰ ਅੰਤਰ ਵਿਆਪੇ ਲੋਕ ਜੋਗੀ ਕੋਈ ਨਹੀਂ ਗਿਆਨ ਵੀ ਇਹ ਪੜਦਾ ਕਰਦਾ ਇਹ ਵੀ ਪੜਦਾ ਤੇ ਲੋਂਦਾ ਇਹੀ ਕਰਦਾ ਬਾਹਰ ਵਿਆਪੇ ਲੋਕ ਬਾ ਲੋਕੋ ਤੇਰਾ ਲੋ ਭਲੀਆ ਅੰਤਰ ਗਿਆਪੀ ਲੋ ਅੰਤਰ ਗਿਆਪੀ ਲੋ ਅੰਤਰ ਗਿਆਪੀ ਲੋ ਸੋਹਣ ਕੁਤਾ ਹਾਂ ਸਬਤ ਉਸ ਆ ਕੋਤਾ ਦੀ ਪੁੰਜਾ ਤੇ ਜੀਰਾਂ ਦੀ ਗੈਂਟਾ ਦੇ ਬਾਰੰਤਾਰ ਦੇ ਕਿਛ ਫਾਕੇ ਰਹੀ ਗੈਂਟਾ ਆ ਬਾਗਲ ਜੀ ਨੇ ਬਾਈ ਬੋਲ ਦਿੱਤੀ। ਜੀ ਰੋ ਜੀ। ਜੇ ਪਾਇਤੀ ਵਧਣੇ ਗੱਲ ਤੁਸੀਂ। ਸਭ ਤੋਂ ਤਾਂ ਹੀ ਕਿਉਂ। ਸਿੱਧੀ ਆ ਕੀ ਤਾਂ ਕੱਢਣੀ ਜਰੂਰੀ ਨਹੀਂ ਹੈ। ਜੇ ਇਸ ਕੰਕੇ ਸੋਪੇ ਜਾਂ ਸ਼ਬਦ ਦੇ ਵਿੱਚ ਜੇ ਗੁਰੂ ਸਿੱਧਾ ਕੀਤਾ ਬਾਤ ਬੰਦਾ ਹੋਣੀ ਨਹੀਂ ਹੁੰਦਾ। ਜਿਹੜੀ ਭੈਅ ਚ ਸੋਤ ਲੈਂਦੀ ਆ ਮੰਨ ਲੈਂਦਾ ਉਹ ਨਾਲੀ ਚੋਂ ਬਾਹਰ ਕੱਢੇ ਜਾਂਦੀ। ਕੁਆਰੇ ਸੁਣੀ ਹੋ ਕੇ ਗੱਲ ਕਰਦੇ ਹਾਂ ਕਿ ਉਹ ਪਤਾ ਜੀ ਉਹ ਉਸ ਬੱਦੇ ਦੀ ਪੁੱਛ ਕੇ ਮੈਂ ਕੁਝ ਇਹੋ ਜਿਹਾ ਹੋਇਆ ਕੋਰੂ ਪਰਮੇਸ਼ਰ ਦਾ ਨਾਮ ਹੈ ਕੋਟਾ ਦੇ ਨਲਗੀ ਦਾ ਦੀ ਇਹਦੀ ਸਰਦ ਨੂੰ ਪਰ ਨਾਲ ਦੇ ਪਿੱਛੇ ਰਹਿਣ ਦੀ ਬਾਹਰ ਵੜੇ ਨੂੰ ਹੋਏ ਹੋ ਗਾ ਲੈ ਪਿੱਛੇ ਰਹਿਣ ਦੀ ਬਸ ਸੋਤਾ ਹੋਏ ਗੋਲਾ ਗਿਆਂ ਚਲਾ ਬਸ ਤਰੇ ਰਹੇ ਸੁੱਤ ਗਿਆਂ ਤੇ ਗੋਲੇ ਦਰਨ ਗੱਡੀ ਆਵੇ ਜੇ ਲੈ ਕੇ ਨਾ ਬਾਹਰ ਖੰਡੀ ਬੀ ਉਹ ਬਾਹਰ ਪੜਵਾ ਜਾਂਦੇ ਡੋਂ ਦਾ ਬਾਈ ਸੀ ਜੋ ਗੱਡੀ ਫਿਰ ਜਿਹਨੂੰ ਇੰਨਾ ਗਿਆ ਨਹੀਂ ਬਾਹਰ ਦੇ ਸਾਰ ਇਹਨੇ ਫਿਰ ਬੁੱਧੀ ਹੋ ਗਿਆ ਨੇ ਸੁਭਾਅ ਉਹ ਉਹ ਡਾਕਟਰ ਵੀ ਹੋ ਗਿਆ ਸਮਝ ਚਲੋ ਅੰਤਰ ਗਿਆਨ ਧਿਆਨ ਇਸ਼ਾਨ ਅੰਤਰ ਵਿਆਪੇ ਲੋਕ ਸੋਮ ਆਪਰੇ ਅਮੀ ਕੋਤੇ ਸੇ ਪੂਝ ਪਾਈ ਐ ਪ੍ਰਕਟੀ ਇਸੀ ਮੁੜ ਕੇ ਜਿਹੜਾ ਕੱਲ ਕਰੇ ਪੂਰਖ ਦੇਖੋ ਸਿੱਧੇ ਕੀ ਹੋਣੀ ਉਹਦੀ ਜੇ ਤਾਂ ਜਿੰਦਾ ਹੋਣਾ ਚਾਹ ਰਕੀ ਰੱਖੋ ਚਾਹ ਬਜੂ ਵੇ ਕਲਿਆਣੀ ਉੱਥੇ ਹੀ ਲੱਥੇ ਉੱਡੀ ਜਾ ਬੇਦੀ ਫਿਰ ਤਾਂ ਜਾਇਆ ਜਾਏਗਾ ਉਹ ਇਹ ਨਹੀਂ ਜਰਿਹਾ ਜਿਹੜਾ ਜਲ ਖਤਰਾ ਹੈ ਤਾਂ ਫਿਰ ਕੀ ਹੋ ਜਾਂਦੀ ਹੈ ਕੋਈ ਹਾਂਜੀ ਅੰਤਰ ਅਗਨ ਪ੍ਰਭਾਤਨ ਸਵਾ ਗਰਪਤ ਅਗਨ ਇਸਤਰੀ ਕਰੋ ਦੀ ਅਗਨ ਹੱਥ ਹੈ ਤਲੋਪ ਤੇ ਇਸਾ ਸਹੀ ਪਕਾ ਦੀ ਆਗਾ ਬਸਤਰ ਅਗਨ ਰਹੰਦ ਅਗਰ ਅਕੋਲੀਆ ਨਹੀਂ ਅੰਦਰ ਹੋਰ ਕਿਸੂਂਦੀ ਅਗਰ ਪੇੜ ਦੇ ਵਿੱਚ ਵੀ ਅੰਗਾਏ ਕਿ ਪੁੱਖ ਲੱਗਦੀ ਹੈ ਉਹਦੇ ਅੰਦਰ ਉਹ ਜਖੜ ਅੰਦਰ ਗੈਲਣੇ ਜਖੜ ਅਗਦੀ ਪੇੜ ਦੇ ਅਗ ਅੰਦਰ ਅਗਰ ਅੰਦਰ ਅਗਰ ਬਾਹਰ ਤਾਂ ਸਵਾ ਅਲਸਰਤਾ ਘਰੋਦੀ ਅਗਨਾ ਬਾਸਾਂ ਤੇ ਸੋਬ ਬੜੀ ਪਰ ਕੀ ਹੁੰਦਾ ਅਸਰ ਕੀ ਹੁੰਦਾ ਬਾਹਰ ਜ਼ਰੂਰੀ ਥੋੜਾ ਬਾਸ ਅੱਗ ਦਾ ਸੇਕ ਬਾਹਰ ਸੋ ਆ ਬਾਜ ਮਿੰਟ ਦੀ ਸੋ ਅੱਧਰੋੜ ਚੱਲੀ ਅੱਗ ਕਿੱਥੇ ਹੋਰ ਕਰਤੀਏ ਲੱਕੜੀ ਜਾ ਲਓ ਕੋਈ ਚਾਹਲੋ ਪਾਠੀ ਚਾਹਲੋ ਵਾਹਿਆ ਲਓ ਅੱਗ ਦਾ ਦੂਰ ਦੂਰ ਤੱਕ ਕਰਨਾ ਸੇਕੋ ਹੋਰ ਅੰਦਰ ਥੋੜਾ ਜਾਗ ਦੇ ਰੋਜੂ ਵੀ ਦਾ ਸਵਾਜੂ ਵੀ ਵਿੱਚ ਸਵਾਦ ਕੀ ਹੋ ਗਿਆ ਅਗ ਪਹਿਲਾਂ ਦਰਸ਼ਨ ਹੋਊ ਸਵਾਦਾ ਫਿਰ ਬਾਅਦ ਚ ਆਊਗਾ ਇਸ ਕਾਰਨ ਇਹ ਅੰਤਰਾ ਤਾਂ ਨਾਲ ਜਲੇ ਜੇ ਇਸ ਤੇ ਮਾਇਆ ਦੇ ਪਹਾਰਾਂ ਦੇ ਰੁੱਤਕ ਹੋਏ ਸ਼ਰੀਰ ਦੇ ਸੋ ਅੰਤਰਾ ਅਦਰ ਬਾਹਰ ਤੁਹਾਨੂੰ ਪਲੇਜ਼ੀਅਰ ਦਾ ਅਗਨ ਅੱਦਰਾ ਸਵਾਭਾਹ ਹੈ ਤੁਹਾਡਾ ਸਾਰਾ ਸਵਾਭਾਹ ਹੈ ਸੋਏ ਉਹ ਜੇ ਜੀ ਅਗਰ ਆਉਂਦਾ ਕਰਕੇ ਜੀਰ ਗਰਮਾ ਜਾਂ ਨਿਕਲ ਜਾਂਦਾ ਜਦ ਇਹ ਢੱਡਾ ਹੋ ਜਾਂਦਾ ਇਹ ਢੱਡਾ ਹੋ ਗਿਆ ਬਾਹਰ ਤੋਂ ਗਲ ਪਾਸਰ ਕਿਹਦੇ ਤਰੇ ਬਾਹਰ ਜਿਹੜਾ ਬਾਹਲਾ ਤਾਂ ਨੇ ਤੇ ਸੋਇ ਬਾਹਲਾ ਤਾਂ ਤੰਦੇ ਬਾਸਵਾ ਦੀ ਵਾਲਾ ਤਾਂ ਜੋ ਫਤਰ ਕੀ ਅੰਦਰ ਹੰਦ ਰੋਧ ਮਾਇਆ ਦੇ ਕ੍ਰਿਸ਼ਣ ਇਹ ਚੀਜ ਹੈ ਸਰ ਹੋਈ ਗਲ ਪੱਥਰ ਕਿਵੇਂ ਧਰੇ ਉਸਾ ਜੇ ਗਲ ਪੱਥਰ ਪਾ ਕੇ ਕੋਈ ਬਹੁਤ ਦੂਰ ਲੰਬੇ ਅਸਾਂ ਉਹ ਤਰ੍ਹਾਂ ਸਾਗਰ ਹੈ ਨਾ ਤਾਂ ਥੱਲੇ ਪਤਾ ਢੂਕਾ ਕਿਤੇ ਨਾ ਪਤਾ ਢੂਲ ਕਿਤੇ ਸਾਡੇ ਦੇ ਪਾਸੇ ਦੀ ਹੈ ਉਹ ਤਰ੍ਹਾਂ ਉਹਨਾਂ ਮਰਜਬਲ ਨੇ ਪੱਥਰ ਉਹ ਬਿਨਾ ਪੱਥਰ ਦੇ ਵੀ ਤਰਿਆ ਜਾਵੇ ਚੰਗਾ ਨਾ ਪਾ ਹੈ ਜਾਤੇ ਜੀ ਦੂਰ ਹਲਾ ਤਾਂ ਉਸ ਦਾ ਉਹ ਪੱਥਰ ਲਗਾ ਲਿਆ ਉਹ ਪੱਥਰ ਪੂਜਾ ਨਾਲ ਪੱਥਰ ਕੇ ਹੈ ਸ਼ਰੀਰ ਤੇ ਜਿਹੜੀ ਪੂਜਾ ਹੈ ਨਾ ਜਿਹੜੀ ਆਪਾਂ ਸ਼ਰੀਰ ਦੀ ਪੂਜਾ ਇਹ ਪੱਥਰ ਦੀ ਤਾਂ ਮੂਰਤੀ ਤੇ ਬਣੋੜੀ ਪਈ ਕੰਕਰ ਦੀ ਗੁਣਤੀ ਬਹੁਤ ਦੇਖਰਾਬ ਨਹੀਂ ਹੁੰਦੀ ਆ ਵਧੀਆ ਪੱਥਰ ਨਹੀਂ ਬਣਾਦੀ ਸੱਦੇ ਦੀ ਔਰ ਜਿੰਦੀ ਲੱਗੇ ਸਾਹਬ ਸੋ ਤਾਂ ਫਿਰ ਬਾਅਦ ਦੀ ਗੱਲ ਹੈ ਪਹਿਲਾਂ ਅੱਛਾ ਪੱਧਰੀ ਮੂਰਤੀ ਬਣਦੀ ਹੋਈ ਜੀ ਸੂਰੇ ਦੀ ਵੀ ਬਣਦੀ ਹੋਈ ਜੀ ਇਹਦੇ ਦੇ ਪੱਥਰ ਪੁੱਛਿਆ ਸਰਦ ਪੁੱਛਿਆ ਸਰ ਕੋਲ ਸਮਾਦਰ ਕਰਾ ਅਥਾਹ ਜੁਬਦ ਰੂਤਾ ਪੱਥਰ ਬੰਦੇਾਰੇ ਕਾਰੇ ਕਨਾਂ ਪਾ ਅਸਰ ਕਰ ਤਾਮਨਾ ਕਰਨ ਵਾਲੇ ਪੱਥਰ ਉਜਾ ਦਾ ਦਿਲ ਦੇ ਪੱਥਰ ਤਾਂ ਆਪ ਨੂੰ ਕੁਝ ਬਤਨ ਬਲੇ ਤੈਨੂੰ ਕਬੇ ਤਾਰੂਗਾ ਪੱਥਰ ਕਿਲੇ ਆਪ ਨੂੰ ਬੜੜੀ ਕੀਏ ਬੈਠੀ ਹੈ ਖਾਲੀ ਕਿਸੇ ਤਰਦੀ ਹੈ ਆਦਮੇ ਵਿੱਚ ਜੋ ਉਸਨੇ ਰਬਾਤ ਜੇ ਹੈ ਉਹ ਉਹ ਤਰਦੀ ਬਦਕਾਰ ਫਰਜੀ ਨੂੰ ਬੁਝੂ ਪਛਤਣ ਆਰਵਾੜੋ ਤਾਂ ਆਪਣੋ ਗੋਰੀ ਕੈਸੇ ਕਰੇ ਜਾ ਕੇ ਅੰਦਰ ਬਸੇ ਪ੍ਰਭ ਆਪ ਕਲਪਾਤਰ ਦਾ ਹਉਰ ਉਹ ਪਥਰਿਕ ਆਪ ਅਥਰਿ ਸ਼ਰੀਰੇ ਕਿ ਬਤਾਏ ਸ਼ਰੀਰ ਦਾ ਹੋਰ ਹੀ ਜੜਦਾ ਭਗਤਾਂ ਕਰੀ ਤਾ ਹਾਂ ਕੈਸੇ ਕਲਪਾਤਰ ਕੈਸੇ ਕਰੇ ਅਥਾ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਜਾ ਕੇ ਅੰਦਰ ਬਸੇ ਪ੍ਰਭ ਆਪ ਇਹ ਅਸਰ ਬਰਵਾ ਬਸੇ ਬੇ ਅਗੇ ਬਰੇ ਦਾ ਆਇਆ ਰਾਜाराम ਅਸ਼ਟਗੁਰੂ ਆਪੇ ਬਸੇ ਬੇ ਉਹ ਜਾਣ ਕੇ ਬਰਦੇ ਬਸੇ ਪਰ ਆਪੋ ਨਾਲੇ ਤੇਜਨ ਸੈਣ ਸਮਾ ਕੇ ਇੱਕ ਤਾਂ ਕੋਈ ਹੋਰ ਹੈ ਫਿਰ ਉਹਦਾ ਬਰਦੇ ਉਹਦੇ ਵਿੱਚ ਕਿਸੇ ਹੋਰ ਨੂੰ ਬਸੇ ਵਾਲੀ ਗੀਦਾ ਬਲ ਚੱਟਦਾ ਬ੍ਰਹਮਦਾ ਮਦੇ ਉਹ ਤਾਂ ਜਿੱਥੇ ਫਾਰਵਰਡ ਵੀ ਨਹੀਂ ਦੱਸ ਰਿਹਾ ਹੈ ਇੱਕ ਕਲ ਕਰਕੇ ਉਹ ਜਿਹੜਾ ਬਾਸਰ ਨਹੀਂ ਹੈ ਹਿਆਰਾ ਕੋ ਉੱਥੇ ਤੋਂ ਪਿੱਛੇ ਪਚਾਉ ਆਉ ਓਏ ਜਿਹੜਾ ਪ੍ਰਭ ਸਾਥ ਅੱਛੇ ਆਇਆ ਸੀ ਨਾਲ ਦੇ ਪ੍ਰਭ ਸਾਥ ਉਹ ਸਾਥ ਦੂਆ ਬਰਬਰ ਦਾ ਹੱਥੋਂ ਬਾਹਰ ਇਹਦਾ ਨਾਲੇ ਹੈ ਉਹ ਸਾਥ ਹੈ ਉਹੀ ਕੋਲੇ ਖਾ ਰਾਮਦਾ ਜੀ ਪਹਿਲਾਂ ਇੱਕ ਵਾਰੀ ਮੇਰੇ ਘਰ ਆਇਆ ਹੈ ਰਾਜਾ ਰਾਮਦਾ ਦਾ ਅੱਛਾ ਸਭ ਦਾ ਨਾਮ ਭੁੱਲਦੇ ਹੈ ਉਹ ਜਿਹੜਾ ਨਾਮ ਭੁੱਲਦੇ ਹੀ ਘਰ ਦੇ ਨਾਮ ਹੁੰਦਾ ਹੀ ਹੈ ਇਹ ਕਹਿੰਦਾ ਵੀ ਆਇਆ ਹੈ ਇਹਦਾ ਨੰਬਰ ਉਹ ਐਬਸੈਂਟ ਵੀ ਚਲੋ ਫਰਚਾਣੇ ਤੈਦੂ ਵੀ ਸਮਝਾਈ ਫਰ ਭਾਈ ਜੀ ਕਰ ਰਹੀ ਨਹੀਂ ਨਾ ਪੀਓ ਉਹ ਤੇ ਰਾਜਾ ਰਾਮ ਲੱਗਿਆ ਹੈ ਉਹ ਕਹੇ 라ਾਮ ਦਾ ਹਰਕਤ ਕਰਦਾ ਮੇਰੇ ਰਾਏ ਰਾਜਾ ਰਾਮ ਉਥੇ ਰਾਮ ਬੋਲੇ ਕਹੇ ਰਾਜਾ ਰਾਮ ਮੈਂ ਰਾਜਾ ਹੁਕਮ ਕਰ ਹੁਕਮ ਤੇ ਅੱਲਾ ਰਾਮ ਹੈ ਰਾਮ ਦਾ ਹਵੇ ਵੀ ਹੁਕਮ ਤੇ ਉਥੇ ਵੀ ਦਾ ਕਲੀਅਰ ਹੈ ਅਸੀਂ ਰਾਜਾ ਰਾਮ ਦਾ ਫਰਜ਼ ਨਹੀਂ ਸਮਝਿਆ ਜਦੋਂ ਵਿਕਾਇਆ ਜਾਂਦਾ ਉਹ ਲੱਗਦਾ ਗੋੜੀ ਕਿ ਰਾਜਾ ਰਾਮ ਐ ਕਿ ਰਾਜਾ ਰਾਮ ਆਹੋ ਜਰੋ ਉਹ ਤਾਂ ਬਾਅਦ ਦੀ ਗੱਲ ਹੈ ਆਹ ਬੱਲੇ ਦੀ ਤਾਂ ਗੱਲ ਹੈ ਉਹ ਤੇ ਰਾਜਾ ਰਾਮ ਤਾਲ ਵਰデア ਉਹ ਤੇ ਕਹਲਾ ਰਾਮ ਬੋਲੇ ਬਸ ਸਰ ਰਾਵਰ ਉਹਦਾ ਚਪੜਾ ਸੀ ਹੈ ਕਰ ਰਾਜਾ ਉਹਨੂੰ ਵੀ ਰਾਹ ਪਰ ਦੋਹਰਾ ਵੀ ਕੋ ਹੋਵੇ ਰਾਜਾ ਦੂਹੇ ਦਾ ਨਹੀਂ ਜਦੋਂ ਚਪੜਾ ਸੀ ਕਾ ਰਾਜਾ ਕਹਿੰਦਾ ਰਾਜਾ ਕਹਿੰਦਾ ਉਹਦਾ ਹੁੰਦਾ ਉਹ ਤੇ ਉਹਨੂੰ ਪਾਰ ਬਰਨ ਸੰਸੇ ਚਾਹੋ ਰਾਜਾ ਜੋ ਨਾਲ ਸੁਣਾਵਾਂਗਾ ਗਾਜ਼ੀ ਕੀ ਸੀ ਮਬਦੁੱਦ ਆਹੋ ਉਹ ਬਹੁਤ ਕਰਦਾ ਉਹ ਦਾਦਾ ਕੋਲ ਪੜਾ ਪੜਿਆ ਤਾਂ ਪੰਜ ਮਾਰਿਆ ਭਗਾ ਕੇ ਉਸ ਪਾਰੇ ਤੋਂ ਮਾਰ ਗਾ ਹੋਲੇ ਗੋੜੇ ਕੋਲੋਂ ਗਾਲ ਫੜਿਆ ਜਾ ਕੇ ਅਦਾ ਤੋਂ ਬੜੀ ਬੈਸਿਕ ਹੋ ਰਹਾ ਪਰ ਬੁਸਪੈਸਾ ਹੋਲੇ ਗੋੜੇ ਪਰ ਕਾਲ ਵੀ ਗਿਆ ਕਾਲ ਠੀਕ ਕਰ ਦੇ ਜਦੋਂ ਅੰਦਰ ਮੈਨੂੰ ਤਾਂ ਕਾਲ ਪਈ ਤੇ ਪਤਾ ਨੂੰ ਹੋ ਗਿਆ ਜਿਹਨੇ ਲੱਭ ਮੈਦਾਨੀ ਨਹੀਂ ਜਿਹੜਾ ਸਾਡੀ ਆਪਣੀ ਹਸਤੀ ਬੜਾ ਕੋਲ ਜਲੋ ਨਾ ਆਪ ਨੂੰ ਪਤਾ ਨਹੀਂ ਚਾਰ ਪਦਾਰਥਾਂ ਨਾਲ ਆਪ ਨੂੰ ਪਤਾ ਨਹੀਂ ਪਾਹ ਦੂਏ ਬੋਦੀ ਗੱਦੇ ਕੋਈ ਪਾਟਾ ਲੈ ਮੇਰੇ ਕੋ ਦਾ ਗੂਮੀ ਬਤਾ ਆ ਦੂਏ ਫਿਰ ਗੱਦੀ ਇੱਥੇ ਅੱਜ ਸਾਡੇ ਬਜ਼ੁਰਗ ਜੀ ਨੂੰ ਦੋ ਦੋ ਕੋਈ ਗੱਡੀ ਦਾ ਟਾਇਰ ਕਿਵੇਂ ਆ ਚੱਕਾ ਤੇ ਆ ਕਾਰ ਦਾ ਕਾਰੇ ਹੈ ਤਾਂ ਆਪਣੇ ਆਪਣੇ ਹੋਣਾ ਤੇ ਪੈਸੇ ਦੂਏ ਤੇ ਦੂਏ ਜਾਉਂਦਾ ਤੇ ਕਹੇ ਵੀ ਲਾਭ ਪੈਸੇ ਤੂੰ ਭਰਾਵੇ ਰੇ ਦੇ ਤੇ ਸੁਖਾ ਨੂੰ ਕੋਲ ਰਹੀ ਵੇ ਬੈਜੋ ਆਪਣਾ ਆਪਣੀ ਸਾਈਜ਼ ਰੱਖਾ ਸਾਡੀ ਕੰਪਨੀ ਦਾ ਸਾਈਜ਼ ਹੈ ਉਹ ਸਾਡੇ ਆ ਜਾਦੇ ਕੰਪਨੀ ਦੇ ਅੱਡਾ ਪਤਾ ਤੇ ਅੰਦਰ ਬਸੇ ਪ੍ਰਭ ਆਪ ਜਾਂ ਤੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਪਤ ਇਹਦੇ ਅੰਦਰ ਸ਼ਬਦ ਗੁਰੂ ਆਪੇ ਬਾਸੀ ਗਏ ਜਿਹਦੇ ਅੰਦਰੋਂ ਗਿਆਨ ਪੈਦਾ ਹੋ ਗਏ ਜੇ ਅੰਤਰਾ ਅਗਰ ਤਰਤੀਬ ਆਣੀ ਉਹ ਵਾਲਾ ਆਜਵੇ ਬਲਾਇਆ ਬੋਲਦਾ ਖਸੁਕਾ ਆਪਰਾ ਬਾਪ ਘਰ ਜੇ ਬਲਾਉਣ ਵਾਲਾ ਆਜਵੇ ਅੱਜ ਵੇ ਸਹਿਜ ਵੇ ਉਹ ਜਿਵੇਂ ਕਹੇ ਉਹ ਵੀ ਬੋਲਦੇ ਬਲਾਵੇ ਨਾੜੂ ਤੇਜਾ ਨੂੰ ਸਹਿਜ ਸਮਾਵੇ ਉਸ ਚਕਰਾਤਾਂ ਨੇ ਚੇਕਿਆ ਹੋਇਆ ਸਮਾਇਆ ਹੋਇਆ ਬਰਬਰੇ ਕੁਲੋ ਜੀ ਉੱਥੇ ਹਾਂ ਪਰਦੋ ਮਨੂਜੀ ਪਾਸ ਹਾਂ ਜਦੋਂ ਸਾਹੀਵਰ ਤੇ ਪਾਰਸ ਤੋਂ ਸੰਸਕ੍ਰਿਤੀ ਆ ਗਈ ਰਾਜਾ ਦਾ ਪਾਰਸ ਤੋਂ ਸੰਸਕ੍ਰਿਤੀ ਰਾਜਾ ਰਾਮ ਪਾਰਸ ਤੋਂ ਸੰਸਕ੍ਰਿਤੀ ਉਹ ਮਤਲਬ ਥੋੜਾ ਜਿਹਾ بڑا ਜਿਹਾ ਉਹ ਹੈ ਕਿ ਕਿਤੇ ਪਹਿਲਾਂ ਲਿਖਾ ਉਹ ਸੋ ਅੰਤਾਂ ਕਿਰਸ਼ਾ ਭਾਗ ਹੋਵੇ ਉਹ ਹੋਈ ਕਈ ਵਾਰਾ ਗੱਲ ਪਰ ਦੇਖੋ ਰੀਚ ਰਹੀ ਹੋਈ ਜਾਂਦਾ ਸਹੀ ਗਿਆ। ਜੇ ਜਿੱਦ ਨਮਕਾ ਕਾਹਕੇ ਫਿਰ ਜਦ ਉਸੇ ਪੜਦੇ ਦਸਤਾ ਸੁਧਿਆ ਰਹਣ ਫਿਰ ਉਹ ਜਲ ਪਟਸੀ ਜਿਹੜਾ ਉਹ ਥੋੜਾ ਬਹੁਤਾ ਕਿਤੇ ਰਹਿ ਜਾਂਦਾ ਫਿਰ ਜੀ ਆਈਡੀਆ ਉਹ ਕਦੇ ਨਾ ਪੂਰੀ ਹੁਣ ਤਵੇ ਉਹ ਗੱਲ ਫਿਰ ਸੋਪਣਾ ਜਿਵੇਂ ਗੱਲ